ਇਸ ਜਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗੱਤ ਜਾਣੇ ਜਿਸ ਵੇਸਪੇ ਗੁਰ ਕਾ ਮਨ ਮਾਨਣਾ ਹੈ ਉਹ ਤਾਂ ਕੋਈ ਛੂਟ ਨਹੀਂ ਇਸ ਪਰ ਮਨ ਬੇਚੇ ਸਤਗੁਰ ਦੇ ਪਾਸ ਆਇਆ ਕਿ ਕਰਨਾ ਮਨ ਬੇਚੇ ਦਾ ਮਤਲਬ ਕੀ ਹੈ ਮਨ ਬੇਚੇ ਦਾ ਮਤਲਬ ਕੀ ਹੈ ਮਨ ਸਮਝਾਇਆ ਮਨ ਬੇਚੇ ਸਤੁਰੂ ਦੇ ਪਾਸ ਦੇਸਵਸ ਵੇਗੁਰ ਕਾ ਮਨ ਮੰਨਾ ਹੈ ਆਪਣਾ ਮਨ ਨੂੰ ਇੱਕ ਬਸੇ ਰੱਖ ਕੇ ਪੂਰੇ ਦਾ ਪੂਰਾ 100% ਗੁਰੂ ਦਾ ਬੰਨ ਮੰਨਣਾ ਹੈ ਗੁਰੂ ਜੀ ਉਹ ਕਰੇ ਜਿਤੋਂ ਗੁਰੂ ਤੁੰਦਾ ਉਹ ਤੁੰਦ ਜਾਵੇ ਗੁਰਦੇਵ ਜੀ ਗੁਰੂ ਦਾ ਆਪਾ ਨਹੀਂ ਕਹਿ ਸਕਦੇ ਉਹ ਚੜਿਆ ਹੋਇਆ ਸਤਿਪੁਰ ਜਿੱਦ ਨੂੰ ਕਹਿੰਦਾ ਜੋ ਸਤਗੁਰ ਕਹਾਂਗਾ ਉਹ ਕਰੇ ਵੀ ਸੁਖਿ ਸੁਖੇ ਉਹਦਾ ਗੱਲ ਮੰਨੇ ਸੋ ਸੇਵਕ ਪਰਮੇਸ਼ਰ ਕੀ ਗੱਤ ਜਾਣੇ ਸੋ ਸੇਵਕ ਉਹੀ ਸੇਵਕ ਆ ਉਹ ਪਰਮੇਸ਼ਰ ਦੀ ਜਿਹੜੀ ਗੱਤ ਆ ਪਰਮੇਸ਼ਰ ਦਾ ਭਾਣਾ ਪਰਮੇਸ਼ਰ ਦੀ ਗੱਤ ਪਰਮੇਸ਼ਰ ਦਾ ਭਾਣਾ ਹੀ ਪਰਮੇਸ਼ਰ ਦਾ ਭਾਣਾ ਹੀ ਦੀ ਗੱਤ ਆ ਉਹਦੀ ਗੱਤ ਹੀ ਆ ਪਰਮੇਸ਼ਰ ਦੀ ਗੱਤ ਜਾਣੇ ਪਰਮੇਸ਼ਰ ਦਾ ਭਾਣਾ ਬੁਝਣਾ ਪਰਮੇਸ਼ਰ ਦਾ ਭਾਣਾ ਤੂੰ ਸਮਝਣ ਲੱਗ ਜਾਂਦਾ ਉਹ ਪਾਣਾ ਕੀਆ ਜਾਣਨ ਲੱਗ ਜਾਂਦਾ ਹੈ ਸਮਝ ਆ ਜਾਂਦੀ ਹੈ ਪਾਣਾ ਕੀ ਹੈ ਕੀ ਹੋਣ ਵਾਲਾ ਹੈ ਆਉਣ ਵਾਲੇ ਸਮੇਂ ਚ ਥੋੜਾ ਬਹੁਤ ਉਹਨੂੰ ਪਤਾ ਲੱਗ ਜਾਂਦਾ ਕਿਧਰ ਨੂੰ ਗੱਲ ਜਾ ਰਹੀ ਹੈ ਕਿੱਥੇ ਜਾਣੀ ਹੈ ਉਹਨੂੰ ਇਹ ਗੱਲ ਦੀ ਸਮਝ ਆ ਜਾਂਦੀ ਹੈ ਕੀ ਹੋਣ ਵਾਲਾ ਹੈ ਅੱਪੇ ਹੀ ਹੁੰਦਾ ਉਦੋਂ ਜਾ ਰਹੇ ਸਭ ਕੁਝ ਉੱਤੋਂ ਚੱਲਿਆ ਪਾਣੀ ਬਾਗ ਤੋਂ ਥੱਲੇ ਆਪੇ ਆ ਜਾਂਦਾ ਕਾਹਦੇ ਬੈਠੇ ਰੋਏ ਸੀ ਉਹਨੇ ਕੋਈ ਕਿਤੇ ਨਹੀਂ ਜਾਂਦਾ ਹਾਂਜੀ ਸੋ ਸਤਗੁਰੂ ਜਿਸ ਰਿਦੇ ਹਰ ਮਨ ਹੋ ਅਣਕੁਬਾਰ ਗੁਰ ਕੋ ਮਿਲ ਜਾਉ ਸੋ ਸਤਗੁਰ ਸਤਗੁਰ ਕੌਣ ਨੇ ਹੁਣ ਜਿਸ ਰਿਦੇ ਹਰ ਮਨ ਹੋ ਜੇ 20 ਵਸੇ ਸਤਗੁਰ ਦਾ ਬਣ ਬਣਾ ਸਤਗੁਰ ਕਹਿਆ ਜਾਓਗੇ ਵੀ ਠੱਗ ਲਾਂ ਢੋਲ ਲਿਓ ਜਿਸ ਰਿਦੇ ਕਿ ਮਨ ਹੋ ਰੇ ਕਿਸੇ ਕੋਲ ਨਾ ਦੇ ਜੀ ਹਾਂ ਥੱਗ ਵੀ ਬਹੁਤ ਨਹਿਟਕੀ ਵੀ ਹੋ ਜੂਗੀ ਥੱਗੀ ਤੋਂ ਬਚਣ ਖਾਤਾ ਥੱਗਾ ਤੋਂ ਬਚਣ ਖਾਤਾ ਜਰੀਆ ਸੋ ਸਤਗੁਰ ਜਿਸ ਰੇਤੇ ਹਾਲ ਨਾ ਜਿਸ ਰੇਤੇ ਨਾ ਉਹ ਸਤਗੁਰ ਵਾਲੀ ਚੋਰ ਹੈ ਖਿਰਦੇ ਵਿੱਚ ਨਾਮ ਸੀ ਜਾਹਲ ਕੀਤਾ ਕੱਢ ਕੇ ਦਿਖਾਇਆ ਨਹੀਂ ਸਤਗੁਰ ਉਹਨੇ ਬੈਠੇ ਸਰਦੇ ਵਿੱਚ ਨਾ ਹੈ ਸਾਬਤ ਨਹੀਂ ਕੀਤਾ ਸਤਗੁਰੂ ਬਣੇ ਬੈਠਾ ਰਿਹਾ ਇਹ ਤਾਂ ਫਿਰ ਇਹ ਤਾਂ ਫਿਰ ਸੀ ਤੇਰੀ ਠਗੀ ਗੁਰਬਾਨੀ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਸੀ ਗੁਰਬਾਨੀ ਤੁਸੀਂ ਲਈ ਬੈਠਾ ਤੁਸੀਂੋਂ ਗੁਰਬਾਨੀ ਤੇ ਭਰੋਸਾ ਕਿ ਕਰਦੇ ਤੁਸੀਂ ਉਹ ਸਤਗੁਰੂ ਤੁਸੀਂ ਤਾਂ ਸਿੱਖ ਬਣੀ ਅਜੇ ਸਤਗੁਰੂ ਸੱਜ ਪਾਸੇ ਰਿਹਾ ਜਿਹਦਾ ਗੁਰਬਾਨੀ ਤੇ ਯਕੀਨ ਨਹੀਂ ਗੁਰਬਾਨੀ ਤੇ ਭਰੋਸਾ ਨਹੀਂ ਉਹਦਾ ਜੋ ਸਿੱਖ ਬਣੀ ਹੈ ਸਤਗੁਰੂ ਦੀ ਤਾਂ ਗੱਲੇ ਸੁਣ ਨਹੀਂ ਨਾ ਲਵੇ ਉਹ ਉਦਾ ਸਿੱਖੀ ਚ ਵੀ ਖੋਟਾ ਖੋੜਨ ੜਿਓ ਜੇ ਮੇਰੇ ਚ ਖੋਟ ਹੈ ਮੈਂ ਖੋੜ ਰੱਖ ਕੇ ਸਤਗੁਰ ਪੰਥਾ ਤੇ ਖੋੜ ਤਾਂ ਸਿੱਖੀ ਚ ਰਾਹ ਰਿਆ ਕੋਟੇ ਰੜੂ ਵੀ ਤੇ ਸੰਗਤ ਵਿੱਚ ਖੋੜ ਰਾਲਿਆ ਸਾਰੀਓ ਖੋਟੀ ਕਰਦੀ ਸਾਰੀਓ ਸੰਤ ਖੋਟੀ ਜੇ ਸਤਗੁਰ ਖੋਟਾ ਸੰਤ ਵੀ ਖੋਟੀ ਹੈ ਕਹਦਾ ਖਰਾ ਹੋ ਗੋ ਨੂੰ ਛੱਡ ਜੂਗਾ ਖਰਾ ਛੱਡ ਜੂਗਾ ਖੋੜ ਛੱਡ ਜੂਗਾ ਖੋੜ ਕਿੰਨੀ ਬਜੀਆ ਘਰਾ ਪੜਨਾ ਕਿੰਨਾ ਬਚਿਆ ਆਪਣਾ ਆਪਣਾ ਦੇਖ ਲੈ ਤਾਂ ਸਮਝ ਆ ਕਰਨੀ ਹਾਂਜੀ ਸੋ ਸਤਿਗੁਰ ਜਿਸ ਜਿਸ ਦੇਦੇ ਹਰ ਨਾ ਅਨਕ ਵਾਰ ਗੁਰ ਕੋ ਵੱਲ ਜਾਉ ਅਨਕ ਵਾਰ ਗੁਰ ਕੋ ਵੱਲ ਜਾਉ ਉਹਨੇ ਜਾਂਦੇ ਕੁਰਬਾਨ ਜਾਂਦਾ ਉਸ ਦੇ ਤੇ ਜਿਹਦੇ ਹੱਦ ਵਿੱਚ ਨਾਮ ਹੋਵੇ ਇੱਕ ਵਾਰ ਅਨੇਕ ਵਾਰ ਕਰਤੇ ਗਏ ਜਾਉਂਗੇ ਜਿਹਦੇ ਹੱਦ ਵਿੱਚ ਨਾਮ ਵਾਲਾ ਹੁੰਦੇ ਵਹ ਤਾਂ ਇੱਕ ਵਾਰ ਬਲ ਬਲ ਜਾਉਂਦਾ ਸੀ ਕੁਰਬਾਨ ਹੋਣੇ ਜਾਏਗਾ ਤੁਸੀਂ ਹਾਂ ਜੀ ਸਰਬਨਿਧਾਨ ਦਾਤਾ ਬ੍ਰਹਮ ਰੰਗ ਰਾਤਾ ਸਰਬਨਿਧਾਨ ਜੀ ਦਾ ਦਾਤਾ ਕੌਣ ਸਤਗੁਰੂ ਸਭ ਸਰਬਨਿਧਾਨ ਨੇ ਉਹਦੇ ਕੋਲ ਜੀ ਕਦਾਤਾ ਜੀਵਨ ਦਾਨ ਦੇਂਦੇ ਸਾਰੇ ਹੀ ਦਵਾਈਆਂ ਨੇ ਉਹਦੇ ਕੋਲ ਪਰ ਉਹਦਾ ਹਾਲ ਜੀ ਕਦਾਤਾ ਜੀਵਨ ਦਾਨ ਨੂੰ ਜੋ ਚਾਹੀਦੀਆਂ ਨੇ ਜੀਵਨ ਦਾਨ ਚਾਹੀਦਾ ਸਾਰੀਵਰ ਚਾਹੀਦਾ ਜੀ ਸਾਰਾ ਖਜਾਨਾ ਉਹਦੇ ਕੋਲ ਕੋਈ ਐਸੀ ਦਵਾਈ ਨਹੀਂ ਜਿਹੜੀ ਉਹਦੇ ਕੋਲ ਨਾ ਹੋਵੇ ਕੋਈ ਟੀਕਾ ਲਈ ਕੋਈ ਮੱਲ ਲਪਟੀ ਸਭ ਕੁਝ ਹੈ ਉਹਦੇ ਕੋਲ ਜੋ ਜੀ ਆ ਜੀ ਜੋ ਜੀ ਜੀ ਵਿਚਾਰ ਆਤ ਪਹਿਰ ਪਾਪ ਜਰੀਰ ਹੋਣੀ ਚਾਹੀਦਾ ਸਰੀਰ ਆਲਾ ਜੀ ਜੀ ਦਾ ਸਰੀਰ ਉਹ ਸਰੀਰ ਆਲਾ ਪਰਮੇਸ਼ਰ ਕੋਲ ਹੈ ਕੋਲ ਬੋਲਦੇ ਆ ਉਹ ਪਰਮੇਸ਼ਰ ਕੋਲ ਉਹਨੂੰ ਜੀ ਆਲਾ ਜਮਾ ਹੈ ਪਰਮੇਸ਼ਰ ਸਰੀਰ ਆਲਾ ਨਹੀਂ ਹੋ ਅਸੀਂ ਸਰੀਰ ਆਲਾ ਗੁੰਦਿਆ ਜੀ ਆਲਾ ਬੋਲ ਕਹਿੰਦੇ ਜੀਹਾਲੋ ਤੱਕ ਹਾਇ ਸਰੀਰ ਵਾਲਾ ਹੋ ਗਈ। ਉਹ ਨਾਲੇ ਕਿ ਕਰਕੇ ਬੰਨਾ। ਨਾਲੇ ਕਿ ਕਰ ਤਾਂ ਕਿ ਬੰਨਾ। ਗੁਰੂ ਸਾਹਿਬ ਕੇ ਮੰਗਦੇ ਨੇ ਸਰੀਰ ਵਾਲਾ ਸਰੀਰ ਵਾਲਾ ਹੁੰਦਾ ਵੀ ਉਹੀ ਦੇ ਰਹੇ ਨੇ। ਗੁਰੂ ਸਾਰਿਆਂ ਦੀ ਪ੍ਰਸੋਤ ਹੋਈ। ਲੈਣ ਵਾਲੇ ਵੀ ਦੇਣ ਵਾਲਾ ਦੀ। ਅਸਲ ਗੁਰੂ ਤੇਲਾ ਦੋਏ ਲਾਲਚੀ ਨੇ। ਦੋਨੋਂ ਖੇਲਦੇ ਦੋ। ਉਹਦਾ ਕਹਿਣਾ ਮੈਂ ਸੌਦਾ ਨੋਟ ਤੇਰੇ ਹੱਥੋਂ ਤੇ ਇੱਕ ਗ੍ਰਾਂਟੀ ਤੇ ਅਰਜ਼ਾ ਛੱਡੀ ਬੜੀ ਕਰਾ ਲਉ ਮੈਨੂੰ ਰਾਜੇ ਤੋਂ ਉਹ ਕਹਿੰਦਾ ਤੂੰ 100 ਦੇ ਜਾ 50 ਦੇ ਮੈਂ ਤਾਂ ਅਰਜ਼ਾ ਦੇ ਕਹਿੰਦੇ ਮੈਂ ਕਹਿੰਦਾ ਤੂੰ ਦੁਆ ਦੇਣਾ ਲਿਖ ਕੇ ਦੇਣਾ ਮੈਂ ਦੇਵ ਚੋੜ ਦੇਣਾ ਮੈਂ ਤਾਂ ਬੋਲੇ ਦੇਣਾ ਤੂੰ ਜੋ ਮਰਜੀ ਬੁਲਾ ਲੈ ਦੋਹੇ ਲਾਲ ਕੀ ਨੇ ਸਰਬਨਾਲ ਜੀ ਦਾ ਦਾਤਾ ਬ੍ਰਹਮ ਰੰਗ ਰਾਤਾ ਸਰਬਨਾਲ ਜੀ ਦਾ ਦਾਤਾ ਕੋਣ ਆਠ ਪੈਰ ਪ੍ਰਾਪਤ ਪਰ ਬ੍ਰਹਮ ਰੰਗ ਬ੍ਰਹਮ ਰੰਗ ਰਾਤਾ ਪਰ ਬ੍ਰਹਮ ਦੇ ਰੰਗ ਦੇ ਵਿੱਚ ਅਠੇ ਪੈਰਾਂ ਗਿਆਰਿਆਂ ਦੇ ਜਿਹੜਾ ਉਹ ਹੈ ਉਹ ਜੀ ਦਾ ਉਹ ਉਹਦੇ ਕੀ ਹੈ ਨਾਮ ਇਹਨਾਂ ਦਾ ਆਣਾ ਬ੍ਰਹਮ ਜਨ ਜਨ ਵਿੱਚ ਪਰਬ੍ਰਹਮ ਬ੍ਰਹਮ ਵਿੱਚ ਜਨ ਜਨ ਵਿੱਚ ਪਰਬ੍ਰਹਮ ਬ੍ਰਹਮ ਦੇ ਵਿੱਚ ਜਨ ਦੇ ਪਹਿਲਾਂ ਕਿੱਥੋਂ ਪਹਿਲਾ ਹੋਇਆ ਉਹਨੂੰ ਮੈਸੇਜ ਕਰ ਬ੍ਰਹਮ ਦੇ ਵਿੱਚ ਜাদু ਹੁੰਦਾ ਹੈ ਜਨਮੇ ਪਾਰਬ੍ਰਹਮ ਹੁਣ ਜਨਮੇ ਪਾਰਬ੍ਰਹਮ ਜੋ ਪਾਰਬ੍ਰਹਮ ਆ ਜਾਂਦੇ ਅੰਦਰੇ ਆ ਨਾ ਹੋ ਜਾਂਦੇ ਹਿਰਦੇ ਵਿੱਚ ਆ ਨਾ ਹੋ ਪ੍ਰਗਟ ਹੁਕਮ ਹੁਕਮ ਉਹ ਗਵੰਦਰੋਂ ਪੈਦਾ ਇੱਕ ਹੋਇਆ ਤਾਂ ਹੀ ਉਹ ਗਿਆ ਜੰਦ ਦੇ ਵਿੱਚ ਕਿ ਕਿੰਦੇ ਵਿੱਚੋਂ ਨਿਕਲਿਆ ਉਹਦਾ ਪੈੜ ਪੈਦਾ ਕਿੱਥੋਂ ਹੋਇਆ ਬੀਜ ਵਿੱਚੋਂ ਬੀਜ ਵਿੱਚ ਤਾਂ ਹੈਗਾ ਉਹਦੇ ਵਿੱਚ ਬੀਜ ਫੜਿਆ ਜਾਂ ਬੀਜ ਹੈ ਬੀਜ ਵਿੱਚ ਹੁੰਦਾ ਜੀ ਜੀ ਜਦ ਇੱਕ ਹੋ ਕੇ ਜਿਹੜਾ ਮਨ ਹੈ ਜੀਵ ਇਹ ਤਾਂ ਬ੍ਰਹਮ ਤੋਂ ਪਹਿਲਾਂ ਹੁੰਦਾ ਇਹਦਾ ਬ੍ਰਹਮ ਚੰਦਾ। ਫਮੈ ਪਸਲੇ ਹੋਈ। ਇਹਦਾ ਹੈ ਉਹ ਜਦੇ ਕੋ ਜਾਂਦਾ ਹੈ ਉਹ ਪਾਰ ਬ੍ਰਹਮ ਸਰੂਪ ਤੇ ਦੋਹਾਂ ਜੋ ਨਿਕਲਦਾ ਉਹ ਬਤਾਇਆ ਜਾਂਦਾ। ਜਨਮ ਹੈ ਪਾਰ ਬ੍ਰਹਮ ਉਹ ਜਿਹੜਾ ਜਨਮ ਹੈ ਉਹਦੇ ਮਰਨ ਵਾਲੇ ਪਾਰ ਬ੍ਰਹਮ ਬਣਦਾ ਜਿਵੇਂ ਜਨਮ ਹੀ ਪਾਰ ਬ੍ਰਹਮ ਬਣਦਾ। ਕਿਉਂਕਿ ਜਨਮ ਜਿਹੜਾ ਹੈ ਉਹਦੀ ਸੁਰਤ ਮਾਨ ਸੁਰਤ ਰੂਪ ਧਾਰਨ ਕਰਕੇ ਸ਼ਬਦ ਵਿੱਚ ਮਿਲ ਹੁੰਦਾ। ਮਨ ਨੇ ਬਾਰ ਬਰ ਬ੍ਰਹਮ ਦਾ ਰੂਪ ਬਣਨਾ ਲੀਨ ਹੋਣਾ ਜੋਤਨਾ ਦੇ ਲਈ ਰੂਪ ਸੁਤ ਨਾ ਸ਼ਬਦ ਵਿੱਚ ਲੀਨ ਹੋਣਾ ਧਿਆਨ ਨੇ ਸ਼ਬਦ ਵਿੱਚ ਲੀਨ ਹੋਣਾ ਧਿਆਨ ਕੀ ਸੀ ਧਿਆਨ ਬਣਨਾ ਸੀ ਮਨ ਬਣ ਗਿਆ ਜਨ ਮਨ ਬਣ ਕੇ ਜਨ ਜਾ ਕੇ ਲੀਨ ਹੋ ਗਿਆ ਸ਼ਬਦ ਵਿੱਚ ਜਿਹੜਾ ਪਹਿਲਾਂ ਹੋ ਸੀ ਮੈਂ ਸੀ ਉਹ ਛੱਡ ਕੇ ਤੋ ਤੋ ਹੋ ਗਿਆ ਉਹ ਤੋਂ ਕਰਤਾ ਸੁਧਰ ਗਿਆ ਪਰਪ੍ਰਮਦੀ ਲਈ ਲਾ ਜੜੀ ਹੈ ਉਹ ਨੂੰ ਆਪਣਾ ਸਰੂਪ ਬਣਾ ਲਿਆ ਪਰਪ੍ਰਮਦੀ ਇੱਛਾ ਨੂੰ ਆਪਣੀ ਇੱਛਾ ਬਣਾ ਲਿਆ ਪਰਮੇਸ਼ਰ ਦੀ ਇੱਛਾ ਹੀ ਆਪਣਾ ਲਈ ਬੀਸ ਵਿਸਵੇ ਉਹ ਬੀਸ ਵਿਸਵੇ ਦਾ ਬਣੇ ਦੀ ਉਹ ਬਣ ਗਿਆ ਜਦ ਉਹਦੇ ਅਨੁਸਾਰ ਚੱਲਣਾ ਬੇਪ੍ਰਪ ਉਦਾ ਰੂਪ ਹੋਇਆ ਉਸਾਂ ਗਰਾਜ਼ੇ ਵਿੱਚ ਫਟ ਚੱਲਣ ਨੂੰ ਜਿੱਤੇ ਅੜ ਕੇ ਨਾ ਗਰਾਜ਼ੇ ਬਿਲਕੁਲ ਸਮੂਥ ਚੱਲੇ ਜਨਮੇ ਪਾਰ ਬ੍ਰਹਮ ਬ੍ਰਹਮੇ ਜਨ ਜਨਮੇ ਪਾਰ ਬ੍ਰਹਮ ਇੱਕੇ ਆਪ ਨਹੀਂ ਕੁਛ ਭਰਮ ਇੱਕੇ ਆਪ ਨਹੀਂ ਕੁਛ ਭਰਮ ਨਹੀਂ ਕੁਛ ਭਰਮ ਥੋੜੀ ਕੋਈ ਹੈ ਧੀਰ ਹੋ ਗਿਆ ਵਿਚ ਆ ਕੇ ਇਹ ਕੋਇਆ ਇਹ ਕਿ ਆਪ ਨਹੀਂ ਕੁਝ ਪਰਵਾਨ ਪਰਮਾਣੂ ਕੋਈ ਜ਼ੱਲੇ ਦੀ। ਇੱਥੋਂ ਹਾਂ ਕਿ ਜਾਊਗਾ। ਕੋਣ ਬ੍ਰਹਮ ਦੇ ਪਾਰ ਬ੍ਰਹਮ ਤੱਕ ਪਹੁੰਚਾ ਸਕਦਾ। ਹਾਂ। ਸਹਿਜ ਸਿਆਣੋਂ ਕੋ ਲਿਆ ਨਾ ਜਾਈਏ। ਨਾਨਕ ਐਸਾ ਮੈਂ ਨਾਨਕ ਐਸਾ ਗੁਰਬਟ ਭਾਗੀ ਪਾਈ। ਇਹ ਜਿਹੜਾ ਗਿਆਨ ਹੈ ਸਹਿ ਕਿੰਨੀਆਂ ਸਿਆਣ ਫਿਰ ਨਹੀਂ ਲਿਆ ਜਾਂਦਾ। ਬਹੁਤਿਆਂ ਸਿਆਣਪ ਵਾਲੇ ਨੂੰ ਨਹੀਂ ਮਿਲਦਾ ਹੁੰਦਾ ਹੈ ਜੋ ਸਿਆਣਪ ਲਿਆ ਨਾ ਜਾਈਏ ਆਏ ਵਿਦਵਾਨਾਂ ਨੂੰ ਨਹੀਂ ਕੁਝ ਮਿਲਦਾ ਹੁੰਦਾ ਸਿਆਣਪ ਜਿਹੜੇ ਜ਼ਿਆਦਾ ਖਾਣੇ ਗੋਣੇ ਨੇ ਉਹ ਸਿਆਣਪ ਮੈਨੂੰ ਗਿਆਨ ਹੈ ਜੀ ਇਸ ਤਰੀਕੇ ਨਾਲ ਗਿਆਨ ਲੈ ਲੈਣਾ ਕੋਈ ਅਸੀਂ ਬਿਰਾਂ ਦੱਸੇ ਗਿਆਨ ਲੈ ਲਾਂਗੇ ਕੋਈ ਪਟਾਪ ਨਹੀਂ ਲੱਗਣ ਦੇਣਾ ਅਸੀਂ ਗਿਆਨ ਵੀ ਲੈ ਲੈਣਾ ਇਦਾਂ ਨਹੀਂ ਲਿਆ ਜਾਂਦਾ ਐਸਾ ਗੜਬੜ ਭਾਦੀ ਪਿਆ ਐਸਾ ਗਿਆਨ ਦਾ ਵੱਡੇਆਂ ਭਾਖਾਂ ਕਰਕੇ ਮਿਲਦਾ